ਸਤਿ ਪਤੀ ਜੈ ਮਾਤ ਪਿਤਾ ਸੁੱਤ ਨੀਤ ਨਾ ਭਾਈ ਮਨੂ ਉਹਾਂ ਨਾਮ ਨਾਮ ਤੇਰੇ ਸੰਗ ਸਾਰੇ ਆਏ ਉਹ ਮੰਨਦੇ ਨੇ ਬਈ ਮਾਤ ਪਿਤਾ ਅੱਛੀ ਰਾਇ ਜਦੋਂ ਇਹ ਤਾਂ ਸਾਰੇ ਜਾਣਦੇ ਸੀ ਲੋਕ ਬਈ ਆਮ ਪ੍ਰਚਾਰ ਹੁੰਦਾ ਹੀ ਸੀ ਸਾਰੇ ਕਹਿੰਦੇ ਹੀ ਇਹ ਤੋਂ ਕੋਈ ਗੱਲ ਨਹੀਂ ਉੱਥੇ ਜਦੋਂ ਕਾਲੇ ਵਿੱਚ ਜਿੱਥੇ ਮਾਤਾ ਪਿਤਾ ਵਗਵੀਤ ਭਾਈ ਗਾਣ ਹੁੰਦੇ ਤੇਰੇ ਜਿਹੜੀ ਸੰਸਾਰਛਡਣ ਤੋਂ ਬਾਅਦ ਆਸਰੀ ਛੱਡ ਜਾਣੇ ਕਿਆ ਬਾਤ ਕਹਤਾ ਸੁਤਜੀ ਤਾ ਪਾਣੀ ਕੋਈ ਵੀ ਨਹੀਂ ਹੱਸ ਮਤਨ ਕੋਈ ਵੀ ਨਹੀਂ ਕਰ ਸਕਦਾ ਸ਼ਰੀਰ ਜਿੰਨਾ ਜਰਾ ਕੋਈ ਪਾਣੀ ਪਲਾ ਦੋ ਉਠਾ ਲ ਦੋ ਪਿਛਾ ਲ ਦੋ ਇਹ ਸ਼ਰੀਰ ਇਹ ਨਹੀਂ ਰਹਾ ਫਿਰ ਦਸਤੇ ਜਿੰਨਾ ਜਰਾ ਸ਼ਰੀਰ ਹੈ ਉਹ ਜਰਾ ਆਪਾਂ ਸ਼ਰੀਰ ਨੂੰ ਟੱਚ ਕਰਾਂਗੇ ਵਿੱਚ ਤਾਂ ਹੋਇਓ ਤੇ ਸ਼ਰੀਰ ਤੇ ਹੀ ਵਾਰ ਹੋਵੇ ਆਪਾਂ ਦਸੋ ਕੀ ਕਰਸਾ ਜੀ ਫੇਰ ਆਪਣਾ ਸੰਪਰਕ ਕਟਿਆ ਉਹਦਾ ਸਾਡੇ ਨਾਲ ਸੰਪਰਕ ਹੈਗਾ ਆ ਜਾ ਹੈ ਪਰ ਸਾਡਾ ਕਟਿਆ ਗਿਆ ਉਹਦਾ ਤਾਂ ਉਹ ਜਾਣਦਾ ਸਭ ਨੂੰ ਪਤਾ ਹੈ ਉਹਦਾ ਹੈ ਨਹੀਂ ਹੈ ਇਹ ਬਹਿਚ ਨਹੀਂ ਆਪਾਂ ਬੈਠੇ ਪਰ ਸਾਡਾ ਜਰੂਰ ਕਟਿਆ ਗਿਆ ਲੋਹੇ ਮਾਤ ਪਿਤਾ ਸੁਖ ਵੀ ਤੱਕ ਨਾਮ ਤੇਰੇ ਸੰਗ ਸਭ ਮਾਤਾ ਨਾਮ ਤੇਰੇ ਉੱਥੇ ਇਹਨਾਂ ਮਰਜ਼ੂ ਕਰਨੀ ਆ ਲਾਪਰਵਾਹੀ ਨਾਮ ਦੇ ਸੁਤ ਬੀਤ ਭਰਾਵਾਂ ਬੰਦਾ ਕਰਦੇ ਤਾਵੇ ਜਿੱਤੇ ਇਹਨਾਂ ਨੇ ਨਹੀਂ ਕੰਮ ਹੋਣਾ ਉੱਥੇ ਇਹਨੇ ਕਬੂੜੋ ਕੋਰ ਉਹਨਾਂ ਦਾ ਜਿਆਦਾ ਜੀ ਲੋੜ ਜਿੱਤੇ ਕੁਛ ਵੀ ਨਹੀਂ ਕੰਮ ਹੋਣਾ ਰੱਬਿਆ ਨਹੀਂ ਕਬੂੜੋ ਕਰੀਜ਼ਾ ਜੋਰ ਬਣੀ ਕਾ ਬੋਲ ਰਿਹਾ ਅਕਲ ਬਣੀ ਕਾ ਬੋਲ ਰਹੀ ਉੱਥੇ ਸ਼ਾਇਦ ਬੰਦੂਕਾਂ ਪਾਜੀ ਬੈਠੇ ਧੱਕੂ ਆਏ ਹੋਏ ਨੇ ਉੱਥੇ ਖਲੇ ਨੀ ਕਰੂਦੇ ਨੇ ਬੜਾ ਜੈਰ ਹੋਸਾ ਹਥਿਆਰ ਰੌਸਾ ਉੱਥੇ ਤਾਂ ਬਰੋਈ ਕੰਮ ਹੋਣਾ ਹਥਿਆਰੇ ਕੰਮ ਹੋਣਾ ਉੱਥੇ ਤਾਂ ਨਜਾ ਨਾਮ ਨਿਸ਼ਾਨੇ ਕੰਮ ਹੋਣਾ ਉੱਥੇ ਤੇ ਗਿਆਨ ਦਾ ਯੋੜਾ ਚੱਲਣਾ ਉਹ ਗਿਆਨ ਚਲਾਇਆ ਬਾਉ ਜਿਹੜੀਆਂ ਬਹੁਤ ਜ਼ਿਆਦਾ ਸਾਹਵਾਂ ਜੀਆਂ ਉੱਤੇ ਉਤੇ ਬਾਹਲੀ ਅੱਗ ਦੀ ਸਹਾਇਜ ਅ ਪਰਮਾ ਦੇ ਸਹਾਇਜੇ ਪਰਜਾ ਦੀ ਇਸ ਕਰਕੇ ਅਸੀਂ ਹੀ ਬਿਚਾਰਿਆ ਹੋਇਆ ਨਾਮ ਕੇ ਸੁਤ ਬੀਤ ਬਾਤ ਪਤਾ ਤੇ ਭਾਈ ਇਹ ਦੇ ਕਰਕੇ ਬਹੁਤ ਬਿਚਾਰਿਆ ਹੋਇਆ ਇਹ ਤਾਂ ਸਾਈ ਦੀ ਗੱਲ ਕਰੀ ਐ ਇਹਨਾਂ ਤਾਂ ਮਤਲਬ ਉਹ ਤਾਂ ਸਾਈ ਦਾ ਗੱਲ ਦਿੰਦੇ ਨੇ ਜਿਹਨਾਂ ਦੇ ਰੇਖ ਚ ਓਹੋ ਨਹੀਂ ਨਹੀਂ ਨਹੀਂ ਇਹ ਨਹੀਂ ਕਿਹਾ ਸਾਈ ਇਹ ਨਹੀਂ ਕਿਹਾ ਵੀ ਇਹਨਾਂ ਦੀ ਲੋੜ ਨਹੀਂ ਹੈ ਬਿਲਕੁਲ ਨਹੀਂ ਕਿਹਾ ਕਿ ਕਿਹਾ ਵੀ ਲੋੜ ਨਹੀਂ ਹੈ ਇਹ ਆਇਆ ਤਾਂ ਉੱਕੇ ਉਹ ਕਹੇ ਵੀ ਉਹ ਦੀ ਜਿਹੜੀ ਤਾਂ ਲਾ ਬਰਮਾਈ ਨੇ ਨਾ ਕਰਕੇ ਕੀਤੀ ਹੈ ਭਾਬੇ ਨਾਲ ਦੀ ਲੋੜ ਹੈ ਪਰ ਉਹ ਇੰਨੀ ਇੰਪੋਰਟੈਂਟ ਚੀਜ਼ ਹੈ ਉਹ ਕਿਤੇ ਇਹਨਾਂ ਨੇ ਕਬ ਨਹੀਂ ਉਹਨਾਂ ਨੇ ਕਬਾ ਤਾਂ ਇਹਨਾਂ ਕਰਕੇ ਉਹ ਬਸਾ ਦਿੱਤਾ ਗੱਲ ਕਹੀ ਗੱਲ ਦੀ ਉਹ ਅਰਥ ਨਹੀਂ ਲਾ ਸਕਦੇ ਆ ਗੱਲ ਦੀ ਜਿਹੜੇ ਜਿਹੜੇ ਨੇ ਜੀ ਭਾਈ ਕੁਛ ਨੀ ਤੇਰਾ ਮਦਦ ਕਰ ਸਕਦੇ ਉੱਥੇ ਨਾਮ ਨੇ ਸਹਾਇਤਾ ਕਰਦੀ ਆ ਅੱਛਾ ਇਹਾਂ ਵੀ ਹੈ ਇਹ ਆਪੇ ਉਹ ਵਾਂਗਰ ਬਿਠਾਏ ਮੈਂ ਆਉਂਗਾ ਮੈਂ ਆਵਾਜ਼ ਨਹੀਂ ਕੋ ਮਾਰਦਾ ਰਹਿ ਜਿੱਥੇ ਜਿੱਥੇ ਦੀ ਗੱਲ ਹੈ ਭਾਈ ਜਿੱਥੇ ਕੋਈ ਅ ਸੈਡੂ ਦਾ ਕੋ ਮਿਲਿਆ ਕਰਤੀ ਰੋ ਜੇ ਮੈਂ ਛੇ ਮੇਰੇ ਪਾਸ ਨੂੰ ਮੰਨ ਲੈ ਜੀ ਤਾਂ ਜਲ ਪੱਠੜ ਉਠਲਦੇ ਨੇ ਇਹਾਂ ਦੀ ਰਾਜ ਦੀ ਰਲ ਕੇ ਬਾਈ ਧਾਰੀਆਂ ਨਾਲ ਹੋਣਾ ਥੋੜਾ ਸਾਫ ਕਰਤਾ ਬਬੱਜਾ ਰਾਜ ਨਾਲ ਜੋੜਦੇ ਸਰਕਾਰ ਦੇ ਚੜੀ ਦਿੱਤੀ ਉਹਲੀ ਜਾ ਕੇ ਜਿਹੜੇ ਬਾਗੀ ਸੀ ਉਹਦੇ ਹੀ ਦੀ ਸੀ ਸਰਕਾਰ ਨਾਲ ਬਬੱਜਾ ਰਾਜ ਜੋੜਦੇ ਚੜੀ ਦਿੱਤੀ ਤੇ ਫਿਰ ਉਹ ਜਿਹੜਾ ਦੂਹਦੜਾ ਝੂਠਾ ਹੋ ਗਿਆ ਤੁਸੀਂ ਕਹਿਣਾ ਚਾਹੁੰਦਾ ਵੀ 2 ਸਾਲ ਦੇ ਰਾਜਨ ਨੂੰ ਮਿਤੇ ਮੈਂ ਦਿੱਤੀ ਹਕੂਮਤ ਲੈ ਲਾ ਲਓ ਇਹ ਦਿੱਲੀ ਦੀ ਹਕੂਮਤ ਬਬੂ ਜੀ ਰਾਜਨ ਨਾਲ ਜੋੜਦੇ ਸੰਪਰਕ ਇਹ ਕਹਿਣਾ ਬਸ ਰੋ ਉਹ ਤੋਂ ਬਾਅਦ बच्चन ਤੋਂ ਜਿਹੜਾ ਗੁਰਪਸੀ ਰਿਪੋਰਟਾਂ ਨਹੀਂ ਗਲਤ ਕਰਦੇ ਤੇ ਉਹ ਤੋਂ ਬਾਅਦ ਚੰਦੂ ਨੂੰ ਗਲਤ ਦੇ ਦੋ ਜੋ ਸੀਆਈਡੀ ਸੀ ਚਦੂ ਹੋਣੀ ਕਰਵਾ ਰਹੀ ਸੀ ਦੂਏ ਫਾਈਲ ਸਾਰੇ ਰੱਖ ਕੇ ਉਹਦੀ ਗਲਤ ਹੋਗੀ ਉਹ ਤਾਂ ਦੋੇ ਪਾਸੇ ਕੌਣ ਸੀ ਦੋੇ ਪਾਸੇ ਵਿਆਹ ਵੀ ਸੀ ਉਹ ਪਾਸੇ ਗੁਰੂ ਸੀ ਕਾ ਉਹਦਾ ਰਾਜੇ ਦਾ ਰਾਣੀ ਦਾ ਉਹ ਤਾਂ ਉਹ ਖੜ ਗਿਆ ਇੱਕ ਪਾਸੇ ਹਕੂਮਤ ਹੈ ਇੱਕ ਪਾਸੇ ਉਹਦਾ ਗੁਰੂ ਹੈ ਇਹ ਤਾਂ ਇਹੀ ਹੋਇਆ ਬਈ ਉਹ ਕਹਿੰਦਾ ਤੇਰੀ ਜਗ੍ਹਾ ਪੱਕੀ ਇਹ ਘਰ ਤੇਰੀ ਜਗ੍ਹਾ ਪੱਕੀ ਕਰਦਾ ਰਾਜੇ ਥੋੜਿਆ ਹੋਇਆ ਫਿਰ ਵੀ ਕਰੋ ਫਿਰ ਉਹ ਗਾਲੀਆ ਦੇ ਗਲੇਸ਼ ਦੇ ਤੇ ਉਥੇ ਹੀ ਰਾਜਾ ਨੇਪਾਲ ਨੇ ਉਹ ਨਗੇ ਖਲਾਫੇ ਚਲ ਰੱਖਣ ਵਾਲੇ ਉਹ ਵੀ ਹੋ ਰਿਹਾ ਵਿਚਾਰਤਾਰਾ ਹੋ ਰਿਹਾ ਉਹ ਬੇਦਕ ਵਿਚਾਰਤਾਰਾ ਨਹੀਂ ਇਹ ਹਿੰਦੂ ਪਸ਼ਾਤ ਵਾਲੀ ਵਿਚਾਰਤਾਰਾ ਹੈ ਨੂੰ ਰਾਤ ਕੋ ਨੂੰ ਬੁਧੇ ਰਿਹਾ ਨਾਲ ਜੋ ਉੱਟ ਗਿਆ ਉਹ ਕੇ ਨਾਲ ਜੋੜ ਲਿਆ ਨਾਲ ਗਿਆ ਬੀਬੀ ਉਹ ਮੇਰੇ ਵੀਰ ਦੀ ਜਗਾ ਕਲੇ ਦਾ ਬੇਚਾ ਵਿੱਚ ਆਹ ਹੁਣ 99 ਜਿਡਾਈ ਉਹ ਸੀ ਦੇ ਕਿਲੇ ਸੀ ਵਾਗੀਆਂ ਦੇ ਕਿਲੇ ਉਹਦੇ ਕੋਲ ਬਰਦਾ ਉਹ ਤਾਂ ਤੁਸੀਂ ਇਹ ਨਹੀਂ ਕੀਤਾ ਮੋ ਬਣਾਉਣਾ ਸੀ ਉਹ ਕੋਈ ਬਰਦਾ ਪਰੇਵਾਦ ਤੇ ਸਹੀ ਨਹੀਂ ਜੀ ਨਹੀਂ ਰਹਿਣੀ ਦੇਖਦੇ ਜਸੇ ਉਸ विधागा के कदम पर हां मान से वृद्धि के कहां हां जय मात पिता सुत मीत ना भाई मन उहु ना तेरे सुन सदे वॉरियर तो आग्रहे आए जी आ नहीं है गा राजों, तो राजा जो आग्रहे राजा राजा नागरिक कैद की खबर बाचे परांदे कहता क्या हो गया राजा चले गए सारे करते दौड़ आया आग्रहे ਆਰੇ ਆਇਆ ਨਾ ਗੋਲ ਗਿਆ ਤੇ ਰਾਜੇ ਕਹਿੰਦੇ ਜਿੰਨੇ ਜਿੱਤਲੀਆਂ ਫੜ ਗਿਆ ਤਾਂ ਗੱਲਾਂ ਬੜੀਆਂ ਹੋਈਆਂ ਸੀ ਉੱਤੇ ਆ ਗਏ ਹਲਵਾ ਕਰਾ ਦਿੱਤੇ ਕਲੇ ਸਾਰੇ ਵੀ ਕੋਈ ਸ਼ਿਕਾਇਤ ਹੋਵੇ ਰਾਜੇ ਵੱਲੋਂ ਜਾਂ ਅਮੇਰਕਾ ਨਾਲ ਜੋ ਮੋਰਬਾ ਰਜੇ ਨੇ ਕੋਈ ਸ਼ਿਕਾਇਤ ਕਰੇ ਜੇ ਕੋਈ ਦੂਏ ਵੀ ਥਲੇ ਸ਼ਰਾਬ ਕਰਨ ਵਾਲੇ ਨੇ ਕਰਦੇ ਜੀ ਤੁਸੀਂ ਮਤਲਬ ਉਸੇ ਉਧਰ ਜੋਨ ਪਾਸ਼ਾ ਸ਼ਿਕਰੀ ਨਾਲ ਯਾਹ ਕੋਈ ਕਰਾ ਤੁਸੀਂ ਨਾ ਕਰੋ ਮੈਂ ਹੈਗਾ ਜੰਨਾ ਚੋਰ ਉਹਨਾਂ ਜੇ ਤੁਸੀਂ ਜਿਹੜੀ ਸ਼ਿਕਾਇਤ ਹੈ ਲੜਿਓ ਨਾ ਇਹ ਦੇਪੜਤਾ ਇਹ ਫੜ ਕੌਲ ਦੇ ਵੀ ਜਿਹੜਾ ਰਾਜਾ ਕਰਦੇ ਗੁਰੂ ਵਿੱਚ ਇਹ ਤਾਂ ਇਸ਼ਾਦੇ ਤਾਂ ਜਲਦੀ ਹੈ ਤੇ ਨਾਲ ਜਹਾਂ ਜੈ ਮਹਾਪਿਆਂ ਨੂੰ ਦੂਤ ਜਾਣ ਕੇਵਲ ਨਾਮ ਸੰਗ ਤੇਰੇ ਚਲੇ ਜੈ ਮਹਾਪਿਆਂ ਜਿੱਥੇ ਮਹਾਪ੍ਰਹੰਦ ਦੇ ਦੂਤ ਜੰਮ ਦਲਦਾ ਹੈ ਤਦੂ ਪਰਮਾਤਮਾ ਹਾਵੀ ਹੋ ਜਾਂਦਾ ਨਾ ਰਾਹ ਨਹੀਂ ਕੋਈ ਲੱਭਦਾ ਹੁਣ ਕੀ ਕਰਾਂ ਜੰਮ ਪਰ ਹਲੂ ਗੱਲ ਨਹੀਂ ਕਿ ਪਰਮਾਤਮਾ ਸੁਧਬੁੱਤ ਕੋਈ ਨਹੀਂ ਰਹਿੰਦੀ ਬਾਸ ਆਦਮੀ ਦਾ ਢੇਰਾ ਹੋ ਜਾਂਦਾ ਫਿਰ ਤਾਉਨ ਰੋਪੇ ਪਿਛਾ ਬੈ ਟੌਪੇ ਜਾਵੇ ਫਿਰ ਉਹਦਾ ਬਾਸ ਜੀ ਹੋ ਜਾਂਦਾ ਗੋਣਾ ਇਥੋਂ ਹੀ ਕੱਢੂ ਆਪਣੀ ਅਗਰ ਜੇ ਕੰਮ ਨਾ ਕਰੇ ਫਿਰ ਉੱਥੇ ਕੀ ਕਰੇ प्यार दूज जम डले डले दो करते वो ना टकता के प्राय जित सोचै सोचियो जंदान की करिए इलाज कोई लब्दा ही नहीं है ज्यादा सोचना ज्यादा होण इलाज कोई चिंता होवे इलाज कोई होवे ना उते दूज जब चले है की दूज जब डले उदो भी कोई पेटी हाथ तोड़िया बहुत बड़ी कोई चिंता होवे किसी गलती होवे ਉਹਦਾ ਕੋਈ ਲਾਜ ਨਹੀਂ ਨਾ ਪਤਾ। ਉਦੋਂ ਔਖਾ ਸਮਾਂ ਕਿਹੜਾ ਹੋਊਗਾ ਆਦਮੀ ਦਾ। ਉਹੋ ਕਿ ਅੰਦੂਤ ਜਮ ਚੱਲੇਗਾ। ਜਦੋਂ ਜਮ ਚੱਲੇ, ਕੋਲ ਦੋ ਜਮ ਕਰੇ, ਦੋ ਚੱਕੀ ਚਵਾ ਕੇ ਦਰਨੋ ਪੀਊਗਾ। ਉਹ ਇੱਥੇ ਹੀ ਗੱਲ ਹੈ। ਦੋ ਜਮ ਚੱਲੇ। ਹਾਂ। ਜਹਾਂ ਮਹਾ ਭੈਅਨ ਦੂਤ ਜਮ ਚੱਲੇ। ਸਹਿ ਕੇਵਲ ਨਾਮ ਸੰਗ ਤੇਰੇ ਚਲੇ ਤਾਂ ਨਾਮ ਸੰਗ ਕੋਈ ਇਹ ਆ ਕੋਈ ਸਾਗਤ ਤੈਨੂੰ ਰਾਹ ਉਲਟੇ ਪਾਉਣ ਲੱਗ ਜੂਵੇ ਮਤ ਮੁਠੀ ਦੇਣ ਲੱਗ ਜੂਵੇ ਉੱਥੇ ਜੇ ਤੇਰਾ ਆਪਣਾ ਗਿਆਨ ਹੈ ਤਾਂ ਤੈਨੂੰ ਬਚਾਊਂਗਾ ਤੇਰੇ ਕੋ ਗਿਆਨ ਹੈ ਤਾਂ ਤੂੰ ਉਹਦੇ ਜਾਤ ਤੋਂ ਵੱਡੇਗਾ ਨਹੀਂ ਤੈਨੂੰ ਪਰਮ ਵਿੱਚ ਫਸਾ ਕੇ ਉਹ ਕਰਾਏਗਾ ਆਪਣੇ ਦਾ ਸੁੱਝ ਚਲੂਆ ਜੇ ਮੈਂ ਸੱਤ ਗੱਲ ਦੱਸਾਂ। ਸੱਤਵੇਂ ਦਾ ਦੱਸ ਦੇਣਾ ਕਰ। ਜੇ ਤੁਹਾਡੇ ਕੋਲ ਤਰਕ ਤਖੜੇ ਨਹੀਂ ਸਤ ਤੁਹਾਡੇ ਨੇੜੇ ਵੀ ਨਹੀਂ ਹੁੰਦਾ। ਉਹ ਕਹਿੰਦਾ ਇਹ ਰਲ ਇਹ ਇਹ ਹੋ ਰਿਹਾ ਇਹ ਸਭ ਜਿਹੜਾ ਆਪਣੇ ਬੁੱਤਰ ਜਿਹੀ ਹੁੰਦਾ। ਹਾਂ ਜੇ ਮੁਸ਼ਕਲ ਹੋਵੇ ਤਾਂ ਭਾਰੀ ਹਰ ਨਾਮ ਖਿੰਡ ਮਾਹੇ ਉਧਾਰੀ। ਹਾਂ ਜੇ ਮੁਸ਼ਕਲ ਹੋਵੇ ਆ ਭਾਰੀ ਜਿਵੇਂ ਮੁਸ਼ਕਲ ਪੈ ਜਾਂਦੀ ਹੈ ਸਾਨੂੰ। ਉੱਤੇ ਘਰ ਕੋ ਨਾਮ ਕਰਵਾਏ ਜੇਕਰ ਵੀ ਪਈ ਜੋੜਣ ਹੁਣ ਹੋ ਰਹੀ ਹੈ। ਜੋੜੇ ਦਾ ਇਲਾਜ ਕੀ ਹੈ ਸਿੱਤ ਅਗਰ ਦੇਖੀ ਹੋ ਜੂ। ਜੀਨਾ ਫਾਇਦਾ ਚਾਪਾਇਓ ਅਲਰਜੀ ਹੱਲ ਵੀ ਕਰੂ। ਲੈ ਇਹਦੇ ਨਾਲੇ ਕਹਿੰਦੇ ਹੌਲਾ ਹੋ ਗਿਆ। ਮਨ ਹੌਲਾ ਹੋ ਗਿਆ। ਜਿਆ ਜੋ ਹੋਊ ਜੂ ਹੋ ਚੱਲ ਛੁੱਟੀ। ਕਬਸਾ ਉਹ ਚੰਤਾ ਦਾ ਰਤ ਮਈ ਚੰਤਾ ਦਾ ਰੜਾ ਜਦੋਂ ਉਹ ਉਹ ਉਹਦਾ ਪਹੁੰਚ ਆਉਣਾ ਕਰਦੇ ਬਾਹਰ ਨਾ ਵੀ ਜਿਹੜਾ ਦੇਖਦਾ ਦੇਖੋ ਆਪਣੀ ਜਾਨ ਬਚਾਓ ਪਹੁੰਚਣ ਦੀ ਬਿਗਾ ਰਹਿੰਦੀ ਉਹਨਾਂ ਨੂੰ ਕਹਿੰਦਾ ਆਪਾਂ ਸੇਫ ਹੋ ਨੁਕਸਾਨ ਕੀ ਹੋ ਚੁੱਕੀ ਨਹੀਂ ਹੋ ਜੋ ਰਹੇ ਨੇ ਮੰਨ ਲਿਆ ਵੀ ਤਾਂ ਉਹ ਦੇਖਣਾ ਹੀ ਹੋਦਾ ਕੋਈ ਤੇ ਆਪਾਂ ਬਚੋ ਜਦੋਂ ਆਇਆ ਪਤਾ ਲੱਗ ਗਿਆ ਆਪ ਥੱਲੇ ਨਾ ਗਏ ਐਂ ਕਹਦਾ ਉੱਪਰ ਜਦੋਂ ਬਾਣਾ ਬਣ ਲੈਂਦਾ ਰੌਲਾ ਰੌਲਾ ਜੀ ਤੇ ਕਿਤੇ ਦੂਸਰੋਂ ਰੌਲਾ ਐਸਾਂ ਸਾੜੀ ਦੇ ਲੋਕ ਕੇ ਸਾਰੇ ਰਹਿਣਾ ਜਾਣਾ ਕੇ ਕੁਝ ਵੀ ਨਹੀਂ ਟਿਕੜਾ ਹੈਦਰ ਵੀ ਗਏ ਨਾ ਹੋਵੇ ਤਾਂ ਭਾਰੀ ਹਰ ਕੋ ਉਧਾਰੀ ਭਾਗਿਆ ਨਾ ਦੇ ਬਿਨਾ ਨਹੀਂ ਰਹਿਦਾ ਰੋਣਾ ਜਦ ਮਾਏ ਉਦਾਰੀ ਮੰਨ ਲਵੇ ਹਰ ਕੋ ਨਾਮ ਜੁੱਟੇ ਕਿੰਦਾ ਕਰੋ ਇਹ ਜਿੱਦਾਂ ਖਤਰੂ ਹਨੇ ਕੋ ਪੁੰਨ ਚਰਨ ਕਰਤ ਕੋਟ ਪਾਪ ਪਰ ਹਰੇ ਉਹਨੇ ਚਲਣਾ ਕਿੰਨੇ ਪ੍ਰਕਾਰ ਦੇ ਫੋਟ ਚਰਨ ਦਾ ਅਰਥ ਤੇ ਤੇ ਪ੍ਰਕਾਰ ਆ ਗਿਆ ਕਿਸੇ ਸਮ ਅਨਕ ਚਰਨ ਚਰਨ ਸਾਰੇ ਕਦੇ ਪੈਰ ਕੀਤੇ ਕਦੇ ਵੀ ਟੀਕਾ ਕਰਮੇ ਕਦੇ ਚਰਨ ਦੇ ਅਰਥੇ ਨਹੀਂ ਕੀਤੇ ਕਿਸਨਾਂ ਨੇ ਆਇਆ ਤਾਂ ਹੋਇਆ ਮਹਾਂਕੂਚ ਵੀ ਨਹੀਂ ਆਇਆ ਹੁਣ ਚੱਲਦਾ ਥੱਲੇ ਕਰ ਦੋ ਇਹਦੇ ਸਹੀ ਆ ਕਿਸਨੂੰ ਨਹੀਂ ਉਹਨਾਂ ਕੀ ਕਰਿਆ ਉਹਨਾਂ ਨੇ ਆਈ ਮੜ ਕੇ ਉਹਨਾਂ ਨੇ ਉਹਨੂੰ ਕੋਈ ਕੱਟਾਉਣਾ ਇੱਥੇ ਕਰ ਦਿੰਦਾ ਉਹ ਦਾ ਕੰਮ ਕਰਦਾਂਗੇ ਵੀਰ ਕਰ ਦਾਂਗੇ ਇਹ ਤੋਫੀਕ ਕਰਨ ਵਾਹਗਾ ਨੂੰ ਕਰ ਦਿੱਤੀ ਆ ਆਮ ਲੋਕਾਂ ਨੂੰ ਬੜਾ ਪਤਾ ਲੱਗਦਾ ਉਹਦਾ ਬ੍ਰਿਕੀ ਵਾਲੇ ਨੂੰ ਮੈਂ ਨਹੀਂ ਦਿੱਤੇ ਸ਼ਮਸਨ ਵਾਲੇ ਨੇ ਅਸੀਂ ਚਾਰ-ਚਾਰ ਦੀਵੇਂ ਕਰਦੇ ਹਾਂ ਹਾਂ ਹਾਂ ਉਹਦੇ ਵਿੱਚ ਚੜ੍ਹਦੇ ਆਉਂਦੇ ਨੇ ਇਹਦੇ ਵਿੱਚ ਆਪਣਾ ਜੋਤਿਸ਼ ਵਿੱਚ ਸਾਰੇ ਚੜ੍ਹਨੇ ਚੜ੍ਹਦੇ ਦੋ ਇੱਕ ਚੜ੍ਹਨ ਦੀ ਦ੍ਰਿਸ਼ਟੀ ਦੋ ਚੜ੍ਹਨ ਦ੍ਰਿਸ਼ਟੀ ਅਗਰ ਤੇਰੀ ਚੜ੍ਹਨ ਦ੍ਰਿਸ਼ਟੀ ਸੋ ਜਿੱਦ ਦੁਬੀ ਇਹ ਤੇ ਬੰਦੀ ਹੋ ਬੰਦੀ ਹੈ ਤੇ ਰਹਾਂ ਦੀ ਦ੍ਰਿਸ਼ਟੀ ਇਹਦੇ ਚੱਲ ਹੁੰਦੀ ਹੈ ਪਾਰਟ ਬਾਈ ਪਾਰਟ ਪਾਰਟ ਹੁੰਦਾ ਹੈ ਬਿਲਕੁਲ ਅਨੇਕ ਪੁੰਨਿਆ ਚਰਮ ਨਹੀਂ ਕਰਮ ਕਰਦਾ ਹੈ ਉਹਨੂੰ ਉਦੈ ਕਰਮ ਉਹਨੂੰ ਹੁੰਦਾ ਹੀ ਕਰਮ ਅਨੇਕ ਕਰਤ ਨਹੀਂ ਕਰੇ ਅਨੇਕ ਪ੍ਰਕਾਰ ਦੇ ਕੋਟ ਕਰਬੂ ਕਰਤਾ ਰਹੇ ਨਹੀਂ ਤਰਹਿ ਹਾਂ ਪਰਬਤੀ ਦੂਰੋਂ ਤੇ ਇਹ ਤਾਂ ਪਾਪ ਅਗਰੀ ਅਧਰੋ ਕਲਪਣਾ ਤ੍ਰਿਸ਼ਨਾ ਇਹ ਦੂਰ ਨਹੀਂ ਤੇ ਆਇਆ ਨਾ ਆਗੇ ਰਸਨਾ ਹਤਾ ਨਾ ਕੋਟ ਬਾਪੋ ਕੋਟ ਬਾਪੋ ਨਾਮ ਦਾ ਬਰੋ ਇਦੜਾ ਕਾ ਗਿਆ ਤ੍ਰਿਸ਼ਨਾ ਜੀ ਹੋਰ ਅਦੱਤੀ ਤ੍ਰਿਸ਼ਨਾ ਵੀ ਆਕਰਮਣਾ ਕਰਨੀ ਬਾਪੂ ਆਹੋ ਪਾਣੀ ਤੋਂ ਬਾਹਰ ਜਾਂਦਾ ਆਪਣੇ ਪਾਣੀ ਚੱਲਦਾ ਹੈ ਇਹ পাপ ਹੈ ਜਾਂ ਆਪਣੇ ਪਾਣੀ ਗੁਰਦੇ ਪਾਣੀ ਜਿੱਥੇ ਉਹ ਚੱਲਦਾ ਆਪਣਾ ਪਾਣਾ ਜਿੱਤ ਹੈ ਆਪਣੇ ਪਾਣੀ 'ਚ পাপ ਹੈ ਕੋਟ ਪਾਪ ਜਿਹੜੇ ਕਰੋੜਾਂ ਪ੍ਰਕਾਰ ਦਾ ਵਿਰੋਧ ਕਰਦਾ ਹੁਕਮਦਾ ਉਹ ਹਰ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸ਼ੋਕ ਕਲੇ ਗੁਰਮੁਖੀ ਰੋਗ ਜਪੋ ਮਨ ਮੇਰੇ ਬਤੂ ਕੇ ਨਾਮ ਦਾ ਜਪੋ ਪਰ ਗੁਰਮੁਖਾ ਜਪੋ ਜੇ ਰਾਮ ਦਾ ਹੋਰ ਵੀ ਹੈਗੇ ਬਿਨਾ ਗੁਰਮੁਖਾ ਤੇ ਮਨ ਮੁਖਾ ਨਾਮ ਵੀ ਹੈਗੇ ਜਿਹੜੇ ਰਾਮ ਰਾਮ ਕਰਤਾ ਸਭ ਜਗ ਫਿਰ ਰਾਮ ਨਾ ਪਾਇਆ ਜਾਈਏ ਗੁਰਮੁਖਾ ਨਾਲ ਰਾਮ ਸੀ ਹਰ ਵਾਰ कर ਰੁਕਰ ਲੈ ਉਹ ਵੀ ਹੋ ਜਾਈਏ ਗੁਰਮੁਖਾੜਾ ਨੂੰ ਕੁਝ ਅਲੱਗ ਕਿਸਮ ਦਾ ਹੈ ਦਾ ਗੁਰਮੁਖੀ ਜਦੋਂ ਆਪ ਜਪੋਂ ਉਹਨਾਂ ਮੈਂ ਗੁਰਮੁਖਾੜਾ ਜਪਣਾ ਵੀ ਕਿ ਕਾ ਜੋ ਗੁਰਜੀਤ ਗੱਲ ਕਰਦਾ ਸੀ ਉੱਥੇ ਉਹ ਹੈਗਾ ਉਹਦੇ ਚ ਕਿਤਾ ਹੈ ਦਾ ਨਾਰਦ ਇੱਕ ਸਾਲ ਕੋਲ ਬੈਠੀ ਬੀਬੀ ਕਪਲਾ ਦੱਸ ਜਿਹੜੇ ਮੱਤਾਂ ਦੇ ਸਾਥ ਤਾਂ ਨਹੀਂ ਆਉਂ ਇਹ ਸਾਰਦਾਂ ਦੀਆਂ ਬਣਾਈ ਹੋਈਆਂ ਨੇ ਇਹ ਦੇ ਅਨੁਸਾਰ ਕਿਹਾ ਜਿਹੜੇ ਰੱਦ ਹੋ ਗਏ ਸਾਰੇ ਸਾਰੇ ਸਭ ਰੱਦ ਹੈ ਜਿਹਦਾ ਸਾਰਾ ਰੱਦ ਨੇ ਨਾ ਰੱਦ ਹੋ ਆ ਜੀ ਦਾ ਵੀ ਰੱਦ ਨਹੀਂ ਹੁੰਦਾ ਇਹ ਨਾਰਦੀ ਭਗਤੀ ਆਪਣਾ ਹੀ ਉਹ ਸਾਰੀ ਉਹ ਰੱਦੀ ਦੀ ਟੋਕਰੀ ਵਾਲੀ ਭਗਤੀ। ਰਾਦੋ ਵੀ ਬੈਠ ਕੇ ਆਪਾਂ ਜੱਬਾ ਲਪੇੜ ਕਰਦੇ ਹਾਂ। ਇੱਕ ਰੂਹ ਨਾਲ ਚਰਚਾ ਕਰਦੇ ਹਾਂ। ਖਵਾਸੀ ਉਹ ਉਰੂ ਕੋਲ ਖੜੋਂਦਾ ਗਿਆਨ ਉਹ ਉਰੂ ਖਵਾਸੀ। ਖਵਾਸੀ ਉਹ ਆ। ਗਿਆਨ ਕੋ ਜੰਗਿਆ ਦੇਦਾ ਨਾ ਦੋਹਾਂ ਨਾਲ ਗਿਆਨ ਹੋ ਜੇ ਉਹ ਆਪਣਾ ਗਿਆਨ ਦਿੰਦਾ ਉਹ ਆਪਣਾ ਦਿੰਦਾ ਕਰੇ ਖਵਾਸੀ ਬੈਠੀ ਗੁਰਮਤ ਜਦ ਬਬੇ ਬੁੱਢੀ ਹੋਵੇ ਫੇਰ ਆ ਹੋਵੇ ਫਾਇਦਾ ਸਾਰਾ ਨਾਲ ਦੇ ਗਏ ਪਛਾਣੇ ਉਹ ਕਹਿੰਦੀ ਐ ਸਾਰਾ ਨਾਲ ਦੋ ਦਿਨ ਰੱਖੇ ਨੇ ਜਿਹੜੀ ਕੋਲ ਬੈਠੀ ਆ ਉਹਨੇ ਤਾਂ ਸਾਰਾ ਨਾਲ ਦੇ ਗਿਆ ਤੁਹਾਨੂੰ ਤੇਰੇ ਸਾਰੇ ਹੀ ਰੱਤ ਇਹਦੇ ਸਾਰੇ ਠੀਕ ਉਹ ਤੇ ਨਾਮ ਆ ਗਏ ਉਹ ਕਹਿੰਦਾ ਵੀ ਸਾਰ ਦਸ ਉਹਨਾਂ ਨੇ ਕਿਹਾ ਕੋਈ ਦੇਵੀ ਹੈ ਸ਼ਾਰਦਾ ਦੇਵੀ ਉਹਦੇ ਅਰਥ ਕਰੀ ਬੈਠੇ ਗੁਰੂ ਕਹਿੰਦਾ ਕਰੀ ਬੈਠੇ ਮੈਂ ਚਲੋ ਪਰ ਜਾਂਦੇ ਨੂੰ ਇਹ ਤਾਂ ਉਹ ਕੁਝ ਕਰਨਗੇ ਵਿਚਾਰੇ ਇਹਨਾਂ ਦਾ ਦਿਮਾਗ ਹੈ ਕਿ ਜਲਾ ਗਿਆ ਕਰਦੇ ਸਾਰਾ ਰੱਦ ਲਾਉ। ਜੋ ਕੁਛ ਰੱਦ ਹੋ ਗਿਆ। ਤਪ ਜੋ ਰੱਦ ਹੋ ਗਿਆ, ਨਾਮ ਜੋ ਰੱਦ ਹੋ ਗਿਆ। ਉਹ ਨਾਮ ਜਿਹੜਾ ਗੁਰਮੁਖੀ ਦਾ ਉਹ ਇਹ ਰੱਦ ਨਹੀਂ ਹੋ ਸਕਦਾ। ਇਹ ਨਾਰਾਤ। ਇਹ ਹਰ ਰੱਬਕੀ ਦਾ ਜਪ ਨਾਰਦੀ ਬਕੀ ਦਾ ਨਾਮ ਉਹ ਦਾ ਸਿਮਰਨ ਇਹ ਰੱਦ ਨਹੀਂ ਹੈ। ਇਹ ਤਾਂ ਹੀ ਪ੍ਰਵਾਨ ਹੈ ਦਰਗਾਹ ਚ। ਪੰਜ ਪ੍ਰਵਾਨ ਪੰਜ ਇਹ ਪ੍ਰਵਾਨ ਇਹਦੇ ਜੈਤੀ ਪ੍ਰਵਾਨ ਇਹਦਾ ਗਿਆਨੀ ਪ੍ਰਵਾਨ ਇਹਦਾ ਨਾਮ ਹੈ ਪ੍ਰਵਾਨ ਇਸੇ ਬਾਕੀ ਦੂਏ ਨਾਮ ਇਹ ਨਹੀਂ ਨਾਨਕ ਪਾਵੋ ਸੂਪ ਕਨੇਸ਼ ਹਾਂ ਗੁਰੂ ਜੀ ਨੇ ਉਜਾਗੋ ਮੇਰੇ ਕਿਹੜਾ ਗੁਰਮਖਾੜਾ ਦਾ ਉਹ ਪਾਣੀ ਦੇ ਵਿੱਚ ਇਹਨੂੰ ਸਮਝੋ ਇਹਨੂੰ ਜਪੋ ਤੇ ਤਨੇ ਦੇ ਸੋਹਣ ਗੁਰਮੁਖੀ ਪਾਵੋ ਨਾਮ ਜਪੋ ਮਨ ਮੇਰੇ ਨਾਮ ਪਾਵੋ ਸੋਹਰ ਨਾਮ ਦੇ ਨ பேர் ਬੜੇ ਸੋਹਣੇ ਉਹ ਇਹ ਹੱਡ ਬੀਤੀ ਐ ਆਹ ਪੰਕਤੀ ਤਾਂ ਕੰਨ ਨੇ ਪਰ ਮਨ ਸਾਰਿਆਂ ਦਾ ਯਾਦ ਤੇ ਇਹ ਕਿਹਾ ਆ ਗੱਲ ਮੈਂ ਅਰੰਗ ਤੋਂ ਸੁਣ ਕੇ ਪਾ ਲਿਆ ਪਰ ਜੇ ਜਪਦੇ ਵੀ ਰਹੋ ਨਾ ਵਿਸਰੋ ਤਾਂ ਇਤਨੇ ਦੇ ਪਾ ਮੇਰੇ ਜਾਨਤ ਪਾਵੋ <laughs> <laughs>